ਅਗੇਰ ਪ੍ਰਸਾਦ ਤਾਂ ਰੁਪਰ ਸੁਖ ਬਸੇ ਅਰ ਚੋਸ ਸੁਪਰਾਤ ਮੀਤ ਵਰਤਾ ਸੰਗ ਹਸੇ ਇਹਦੇ ਇਲਾਵਾ ਹੋਰ ਲਾਣਾ ਜਿਹਦੀ ਕਿਰਪਾ ਨਾਲ ਅਗੇਰ ਪ੍ਰਸਾਦ ਇਹ ਧਰਤੀ ਦੇ ਉੱਤੇ ਸੁਖ ਨਾਲ ਬਸਦਾ ਸੁਤਪ੍ਰਾਣ ਦੀ ਪੈਦਾ ਅਰੇ ਧਰਤੀ ਇਹ ਬਣਦੀ ਹੈ ਧਰਤੀ ਬਨਸਪਤੀ ਹੈ ਪੈਦਾ ਹੁੰਦਾ ਖਾਂ ਪੀਂਦਾ ਵੀਰਦਾ ਪਸ਼ੂ ਨੇ ਉਹ ਵੀ ਖਾਧਾ ਇਹਨਾਂ ਦੁੱਧ ਵੀ ਦਿੰਦੇ ਨੇ ਸੋਫਾ ਵੀ ਦੇ ਦੋ ਲੱਕੜੀ ਵੀ ਆ ਪਲਣ ਵੀ ਆ ਘਰ ਵੀ ਬਣਦੇ ਨੇ ਸੋਫਾ ਸੋਫਾ ਤਿਆਰ ਸੀ ਸਾਰੇ ਸਾਧੂ ਘਰ ਸੀ ਤੇ ਜਿਤਾਏ ਹੋਏ ਜਿਉਂ ਤੋਂ ਸੇ ਪਹਿਲੇ ਦੀ ਸੀ ਸਾਧੂ ਜਿਦੇ ਜਿਤਾਏ ਧਰਤੀ ਉਹਨੇ ਪੈਦਾ ਕੀਤੀ ਹੈ ਬਾਦ ਜੋ ਉੱਗਦਾ ਆ ਅਜਰਤ ਦੋਤਾ ਦੇ ਬੀਜ ਘੜਾ ਸੀ ਬਣਾਏ ਨੇ ਬਣੇ ਬਣਾਏ ਹੈਗੇ ਨੇ ਇਹ ਤਾਂ ਕੋਈ ਨਹੀਂ ਬਣਾਇਆ ਹੈਡੀ ਮੈਡਨ ਸਾਡੇ ਕੋਲ ਤਾਂ ਤਾਂ ਵੀਰੇ ਬਟੂਟੇ ਜੰਨ ਲਾ ਕੱਬੇ ਲੈ ਲੈਂਦੇ ਆਪਾਂ ਪਾਲਣ ਵਾਲੇ ਦਾ ਬੰਗੂ ਰੋਣ ਦੇ ਕੋਈ ਦਰਵਾਜੇ ਬਣਾ ਲੈ ਕੋਈ ਛਿੜਕੀ ਬਣਾ ਲਈ ਕੋਈ ਜੋ ਵੀ ਜੇ ਪ੍ਰਜਾਤ ਤਾਰ ਉੱਪਰ ਸੁਖ ਬਸੇ ਸੋਮਤੀ ਇੱਕ ਤਾਂ ਬਾਲ ਦੀ ਗੱਲ ਆ ਕਿਤਾਤੀ ਹੋਰ ਵੀ ਹੈ ਜਿਹੜੀ ਪਹਿਲਾਂ ਕਹੀ ਸੀ ਸਤਗੁਰ ਸਹਿਜੇ ਕਾ ਉਹ ਵੀ ਖੇਤ ਹੈ ਜਿੱਤੇ ਸਤਗੁਰ ਰਹਿਣਾ ਹੈ ਸਹਿਜ ਉਹਤਾ ਕਿ ਖੇਤ ਹੈ ਸਗਲੀ ਧਰਤੀ ਸਾਧ ਕੀ ਉਹੀ ਹੈ ਦੰਦਿਓ ਜਿਹੜਾ ਸਾਧ ਹੈ ਬਾਹਰ ਬੋਲੋ ਧਰਤੀ ਤਾਂ ਇਹਦੀ ਹੈ ਉਤਾਸਰ ਜਿਹੜਾ ਫਿਰ ਉੱਪਰ ਬਹਿ ਕੇ ਜਾ ਕੇ ਅਸਰ ਬਹੁਤ ਵਸਣ ਉੱਪਰ ਬਹਿ ਕੇ ਜਾ ਕੇ ਉਹ ਤਾਂ ਅਗਭੀ ਜਾਣਨਾ ਜਿੱਥੇ ਬਦਮੀਚ ਸੁੱਤ ਭਰਾਤ ਮੀਤ ਬੰਤਾ ਸੰਗ ਹਜ਼ائیں ਸੁੱਤ ਬੀਤ ਰਾਤ ਰਾਤ ਬੰਤਾ ਸੰਗ ਹਜ਼ਾ ਖੇਲ ਲੈਂਦੀ ਦੀ ਕਿਰਪਾ ਕਿਉਂ ਜੇ ਸਾਰੇ ਰਾਜੀ ਕੋ ਨੇ ਤਾਂ ਖੇਲਦਾ ਜੇ ਰਾਜ ਹੋ ਜੇ ਰੋਣਾ ਵੀ ਜਦ ਜਦ ਇਹ ਪੈ ਜਾਂਦਾ ਜਿੰਨਾ ਜਦ ਸੁਖਲਾ ਵਾਸਦਾ ਉਹਨਾਂ ਜੇਰ ਕਿਰਪਾ ਫਿਰ ਤਾਂ ਵੀ ਕਹਿਣਾ ਘਹਿਰ ਹੋ ਗਿਆ ਜਿੰਨਾ ਜਦ ਸੁਖ ਵਾਸਦਾ ਉਹਨਾਂ ਜਦ ਤਾਂ ਵਾਸਤਾ ਹੀ ਹੈ ਸੁਖ ਵਾਸੇ ਜੇ ਪ੍ਰਸਾਦ ਪੀਵੇ ਸੀਤਲ ਜਲ ਇਹ ਪ੍ਰਸਾਦ ਪੀਵੇ ਸੀਤਲ ਜਲ ਠੰਡਾ ਪਾਣੀ ਪੀਵੇ ਸੋਖਦਾਈ ਪਾਵਨ ਪਾਬਕ ਅਮੁਲਾ ਆਇਆਉਣ ਦਾ ਹਬਾਬਿੰਦਰੀਆ ਸੋਖਦਾਈ ਕਬੂਲਾ ਕਬੂਲਾ ਇਹਦਾ ਤਾਂ ਬੁੱਲੇ ਕੋਈ ਨਹੀਂ ਤੇਰੇ ਬਿਨਾਂ ਤਾਂ ਇੱਕ ਸਾਭ ਨਹੀਂ ਸਰਦਾ ਉਹ ਪਾਣੀ ਬਿਨਾਂ ਦੋ ਘੰਟੇ ਜੇ ਪ੍ਰਸਾਦ ਭੋਗੇ ਸਭ ਰਸਾ ਇਹ ਤਾਂ ਕੋਈ ਸਾ ਆਇਆ ਬਸ ਆਇਆ ਗਿਆ ਸਾਨੂੰ ਬੁੱਲਾ ਹਨ ਜੇ ਪ੍ਰਸਾਦ ਸਭ ਰਸਾ ਜੇ ਪ੍ਰਸਾਦ ਸਾਰੇ ਭੋਜਨ ਖਾਣ ਰਸ ਜਿੰਨੇ ਸਤਸਾਦ ਜੀ ਹੋਈਏ ਜੇ ਹੁਣ ਭਾਰੀ ਬਰਸੇ ਨਾ بارشੇ ਨਾ ਹੋਵੇ ਐਚਾ ਸਕੂਲ ਵੀ ਨਹੀਂ ਚੱਲੇ ਜੀਵਨ ਵੀ ਨਹੀਂ ਬੜੀ ਚਿਰਪਾ ਦੀ ਗੱਲ ਐ ਉਹ ਜੇ ਚੰਗ ਜਹੀ بارش ਵੀ ਡੇਰੇਗਾ ਸੰਦ ਨਹੀਂ ਐ ਇੱਥੇ ਕੀ ਕਰੂ ਆ ਜੀ ਜੇ ਪ੍ਰਸਾਦ ਭੋਗੇ ਸਭ ਰਸਾ ਸਗਨ ਸਮਗਰੀ ਸੰਗ ਸਾਥ ਵਸਣ ਆਸਾ ਕਦੀ ਸਮਗਰੀ ਹੈ ਤੇਰੇ ਕੋਲ ਆਲੇ ਬਾਹੀਏ ਤੇ ਅੱਗੇ ਜੰਗਲੇ ਉੱਤੇ ਆਪਣੇ ਵੜਕੇ ਲੈ ਉਹਨੇ ਲੋਤੋ ਵੜਕੇ ਜਾੜੇ ਲੈਣੇ ਤੋੜ ਕੇ ਫਲ ਖਾਏ ਨੇ ਹਸਤ ਪਾਪ ਕਰਨ ਨਿਤ ਰਸਨਾ ਆ ਹੱਥ ਦੇ ਤੇਨ ਤਿਆਰ ਦਿੱਤੇ ਅਬ ਗੰਦ ਤੋਂ ਨੂੰ ਜੇ ਕੋਈ ਪਿਆਸ ਆ ਕਿਤੇ ਦੂਰ ਆਪਣੀ ਖੱਤੀ ਲੇਣੇ ਜਾ ਕੇ ਅੱਧਾ ਕੁਛ ਕਰਕੇ ਫੜ ਤੋੜ ਕੇ ਖਾਲ ਵਿੱਚ ਹੱਥ ਦੇਤੇ ਪੈਰ ਦੇ ਦਿੱਤੇ ਜੇ ਇੱਧੇ ਦਾ ਸਮਾ ਰਾਸ ਜੀ ਵੀ ਉਬਾਲੇ ਰਸਨ ਦੀ ਗਏ ਬਾਹਰ ਨਿਕਲ ਹੈ ਨਾ ਆ ਜਿਹੜੇ ਬਾਹਰ ਦੇ ਰਹੇ ਜੀ ਅਜੀਬ ਇੱਥੇ ਹੀ ਆਉਂ ਕਿਆ ਬੰਦ ਚੀ ਜਿਹੜੇ ਇੱਥੇ ਵਖਰੇ ਕੈਸਾ ਇਨਸਾਨ ਨੇ ਕੌਣ ਸੋੜੇ ਸ਼ਕਤੀ ਦਿੱਤੀ ਦੇਖਣ ਦਿੱਤੀ ਸ਼ਕਤੀ ਜੇ ਤੁਹਾਡੀ ਸ਼ਕਤੀ ਹੈ ਤਾਂ ਕੰਨ ਸੁਣਦੇ ਥੋੜੀ ਸ਼ਕਤੀ ਨਾ ਹੋਵੇ ਕੰਨ ਸੁਣਦੇ ਹੀ ਨਹੀਂ ਜਿਹੜੇ ਬੋਲੇ ਹੁੰਦੇ ਸ਼ਕਤੀ ਨੇ ਵਿੱਚ ਨੁਕਸਰਦਾ ਉਹਨਾਂ ਸੀ ਪਰਨਾ ਤਾਂ ਕਸੂਰਤ ਨਹੀਂ ਆਉਂਦੀ ਉਹਨੂੰ ਦੀ ਵੱਡੀ ਸ਼ਕਤੀ ਸੁਆਏ ਪਿੱਛੇ ਰਹਿ ਜਾਂਦੀ ਉਹ ਜੇ ਤੇ ਰੰਟੀਏ ਜੇ ਉੱਥੇ ਫਿੱਟ ਕਰ ਦਿੰਦੇ ਨਾ ਜਿੱਥੇ ਤੱਕ ਸ਼ਬਦ ਜੰਤ ਤੱਕ ਤੁਹਾਨੂੰ ਵੀ ਲੱਗ ਜਾਂਦਾ ਉਹ ਬੋਲਿਆ ਉਹਨੂੰ ਪਿੱਛੇ ਕਰਤੀ ਸੁਣਦੀ ਤੇ ਪਿੱਛੇ ਉੱਥੇ ਵੀ ਫਿੱਟ ਕਰਦੀ ਉੱਥੇ ਬਣ ਰੱਖੀ ਬੋਲੇ ਦੀ ਗੀਤ ਜੀ ਰਾਈ ਕਨਾਟਕ ਦੀ ਉਹ ਜਿਸੋ ਕਨਾਟਕ ਕਨੀਲ ਦੀ ਜਿਸੋ ਵਾਣੀ ਇਹ ਸਹਿਤਿਆਗ ਅਬਰ ਸੰਗ ਰਚਨਾ ਇਹ ਅਰਸਨਾ ਤਿਆਗ ਅਬਰ ਸੰਗ ਰਚਨਾ ਕੋਸ਼ ਹਦਕੇ ਇਹ ਪੰਜ ਚਾਰ ਸ਼ਕਤੀਆਂ ਉਦੋਂ ਦੀ ਬਣੀਓ ਜਿਹੜੇ ਨਾਲ ज्योत यदि प्रकट करती है देव ने अपनी और शक्तियां भी नाल दितियां देखन दे, है देखने शक्ति जोत है सुनने शक्ति ज्योत विच है खट्टा मीठा तौड़ा कसैला जीभ ने जीभ ने दती वेसे कोई रचना जड़ी कला उदास दी है सुगंध शक्ति होगी देखो सुगुण शक्ति भी होगी जानवर सुगुण शक्ति ना कही है दी चीज है ਜੇ ਖਾਂਦਾ ਉਲਟੀ ਆ ਜਾਂਦੀ ਹੈ ਤੀਨੇ ਮੁੱਕੀ ਛੱਡ ਜੰਨਾ ਹੈ ਗੋਡੇ ਨਾਲ ਉੱਠੀ ਸਕਦੇ ਕੁੱਤਾ ਦੀ ਘਾਟਾ ਸੁੱਕੇ ਇਹਦੇ ਨਾਲ ਵੀ ਚੀਜ਼ਾਂ ਖਾਜੀ ਹਮਾਰੋ ਜੀ ਨਾਲ ਮੁੱਕੀਆਂ ਨੇ ਨਾ ਪੱਜੋ ਜੀ ਨੂੰ ਕਹਿੰਦੇ ਨੇ ਇਹ ਵੀ ਤਾਂ ਨਾਲ ਚੱਦੇ ਸਿਸ਼ੇ ਤਿਆਗ ਅਵਰ ਰਚਨਾ ਨੂੰ ਤਾਂ ਤਿਆਗ ਬਟਾ ਤਿਆਗਿਆ ਹੋਇ ਭੁੱਲਿਆ ਪ੍ਰਜਾਤੀ ਦਾ ਆਪਣਾ ਸੰਗਠਨ ਹੋਰ ਕਿੱਥੇ ਰਚਿਆ ਹੋਵੇ ਅਬਰ ਕਿਤੇ ਵੀ ਹੋ ਚ ਵੀ ਹੋ ਤੇ ਚੱਲੋ ਵੀ ਹੋ ਸਕਦਾ ਪਰਵਾਸ ਚ ਵੀ ਹੋ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਅਬਰ ਹੋਰ ਜਗ੍ਹਾ ਨੂੰ ਜਾ ਕੇ ਨਾਇਜ ਕਿਤੇ ਅੰਦਰ ਛੱਡ ਕੇ ਬਾਹਰ ਰੱਖਿਆ ਹੁਣ ਅਬਰ ਸੋ ਐਸੇ ਦੋ ਘੂੜ ਅੰਧ ਵਿਆਪੇ ऐसे दे दे दे। तो आज रात तेरा हनो पुठा कब दो कहने ना बुराई दो कब गलती नु कहते हो ये मगाना है ये दो कब गलती है जे हो चुकी तेरा की दोगा मेरी की गलती है हां गलती है दोष दो दो ये जेड़ा दोष तेरे लग जाना है इन्हें दोष करेगा जितवे ये कब्जा कर दे भोले हो सबर موڑ اندھ اندھ بیاتے ایسے دو موڑ اندھ بیاتے موڑ سٹا باجو اننا ہو جے گا درکارتا بھی بتارن کو او تے سی नानका جو خزنموں کو تھے جائیں جہڑا خزنماں کیڑا دیتا سب کو جو وہ تو بالکل انہاں دسنا ٹو نہیں ਅੱਖਾਂ ਰਹਿੰਦੇ ਹੋਏ ਵੀ ਉਹਦਾ ਗਿਆਨ ਦੀ ਤਾਊਤ ਉਹਨੂੰ ਮਿਲਦੇ। ਦੋ ਦੋ ਘੁੰਮ ਗਏ ਤੁਸੀਂ। ਦੋ ਸੱਣ ਗਿਆਦਨ। ਉਹਨੇ ਬੱਚੀ ਦੇ ਅੱਖਾਂ ਕਰ ਰਹੇ ਬੰਦੇ ਮਾਜਾ। ਕਹਿੰਦੇ ਇਹੀ ਵਿਆਖਿਆ। ਇਦਾਂ ਹੀ ਵਿਆਖਿਆ ਹੁੰਦੀ ਹੁੰਦੀ ਹੈ। ਅਸੀਂ ਤਾਂ ਸਮਝਣੀ ਸੀ। ਤੁਸੀਂ ਕਹਿੰਦੇ ਵਿਆਖਿਆ ਕਰਦੀ। ਇਹ ਤਾਂ ਸਮਝ ਰਹੇ ਜਿਹੜੀ ਗੱਲ ਕਹੀ ਵਿਚਾਰ ਕਰ ਰਹੇ। ਵਿਆਖਿਆ ਦਾ ਉਹ ਕਰ ਰਹੇ। ਨਾਨਕ ਜੀ ਨਾਮ ਸੁਣਿਆ ਉਹਨਾਂ ਨੇ ਨੋਟੋ ਖਿਆਨ ਕੀਤਾ ਜੀ ਤਾਂ ਪੜ ਕੇ ਸਮਝ ਰਹੇ ਹੋ। ਤਾਂ ਐਸੇ ਦੋ ਮੂਰ ਅੰਧ ਵਿਆਪੇ ਨਾਂ ਲਿਖ ਕੱਢ ਲਿਓ ਪ੍ਰਭ ਉਹ ਕਹਿੰਦੇ ਨੇ ਕਿ ਨਾਂ ਆਪ ਨੂੰ ਕਹਿਣਾ ਕਿ ਮਿੱਦੂ ਤਾਂ ਇਹ ਮੂਰਖਾ ਦੇ ਬਾਰ ਕੱਢ ਲਾ। ਮੇਰਾ ਸਾਜੇ ਜੀ ਆ ਕੁਝ ਬਦ ਰਿਹਾ। ਸੱਜਾ ਦੇ ਲੋਕ ਆ ਕੁਝ ਕਹਿ ਰਹੇ ਨੇ ਆਪ ਕੋ ਸੱਚੇ ਮੂਰਖਤਾ ਬਦ ਰਹੀ ਆ। ਇਹ ਮੂਰਖ ਅੰਤ ਕੋਰ ਅਸੰਖ ਮੂਰਖ ਉਦ ਕੋਰ ਮਨਾਕ ਨੇ ਕਹਿ ਆ ਨਾ ਕਿੱਥੋਂ ਆਏ ਆ ਕਮ ਸੁਣਾਏ ਜੀਨੇ ਆ ਕੋਈ ਦਿੱਤਾ ਦੀ ਉਹਨੂੰ ਵਸਾਰਿਆ ਹੋਇਆ ਤਾਂ ਅਸੰਖ ਮੂਰਖ ਅੰਤ ਕੋਰ ਅਸੰਖ ਚੋਰ ਹਰਾਮ ਖੋਰ ਚੋਰ ਹਰਾਮ ਖੋਰ ਨੇ ਜਿਹੜੇ ਉਹਦੋਂ ਨੂੰ ਜਾਨ ਨਹੀਂ ਦਿੰਦੇ ਬਾਹਰ ਗੁਰੂ ਬੁਲੇ ਬੈਠੇ ਨਾ ਬਾਹਰ ਮਨਾਵਾ ਜੀ ਪ੍ਰਭੂ ਬਾਹਰ ਬੁਲਾਏ ਜੀ ਤੇ ਬਾਹਰ ਅਕਸਰ ਦੇ ਕੋਤੂੜਾ ਰੱਖੋ ਪਰ ਤੇ ਖੰਦੇ ਨੇ ਧਰਮ ਦੀ ਗੱਲ ਕਰਦੇ ਕਰਦੇ ਨੇ ਪੈਸੇ ਖਰੇ ਲਵੇ ਗੱਲ ખોਟੀ ਦੱਸੇ ਬਾਹਰ ਖੋਟਾ ਦੇਵੇ ਤੇ ਪੈਸੇ ਖਰੇ ਲਵੇ ਇਹ ਹਰਾਮ ਹੋ ਰਿਹਾ ਹੋ ਕੀ ਦਿਹਾੜੀ ਲੈ ਲਵੇ ਕੰਮ ਕਰੇ ਨਾ ਜਿਹੜੀ ਦਾ ਫੋਨ ਲਵੇ ਬਾਲਕ ਜਾ ਕੇ ਦੇਖਦਾ ਜੀ ਆਪੋ ਕਰੇ ਨਾ ਆਪੋ ਰੇ ਅਗਰ ਉੱਪਰ ਆ ਕੇ ਹੋਰ ਕੀ